ਸੂਰ ਨਾਹੀ ਕੋੜ ਲਖ ਬਾਹੀ ਲਾਭ ਜਗਤ ਸੈ ਪਾਰ ਪਰਾਨ ਆਇਆ ਰਾਜਾ ਇਹ ਕੋ ਸੁਨ ਰਾਜੇ ਕੋ ਬਹੁਤ ਚਾਹੁੰਦੇ ਬਖਰੋਲਾ ਬਾਹਾਂ ਬਾਹ ਫੜਤੇ ਕਹਿੰਦੇ ਜਿੱਦੀ ਮਰਦੀ ਫੜਨਾ ਤਿਆਰ ਕਰ ਲੈ ਐਸੋ ਝਟਕਾ ਆਲੀ ਹੋਣਾ ਆਏਗਾ ਜੰਮ ਤੇ ਸਾਰੇ ਜਣਾ ਬਹੁਤੋ ਝਟਕਾ ਕੋਈ ਇਹਦਾ ਕੋਈ ਪਤਾ ਨਹੀਂ ਨਸ ਕੋਟਨਾ ਓਟਰ ਨੂੰ ਛੋਟਰ ਨੂੰ ਤੋਸਾ ਅਸ ਤੇ ਬਗਾੜ ਦਊਗਾ ਤੇ ਜਾੜੋ ਜਿਹੜੇ ਗਰੇ ਖਲੇ ਨਾ ਤੇਰੇ ਹਰ ਫੌਜਾਂ ਨੇ ਇਹਨਾਂ ਨੇ ਕੋਈ ਪਛਾਣ ਨਹੀਂ ਕਰਨਾ ਨਾ ਜ਼ਰਾ ਖਜਾਂਦਾ ਆਵੇ ਕਬੂ ਨਾ ਤੱਕ ਛੋੜੇ ਭਾਈ ਕਿ ਤੂੰ ਰਾਜਾ ਬੜਾ ਆਦੀ ਜਦ ਵੀ ਜਾ ਘਰ ਹੋ ਗੱਟਾ ਕਰਕੇ ਜਿਹੜਾ ਰਾਜਾ ਇੱਕ ਕੋਟ ਲੱਖ ਬਾਹੀ ਹੋ ਜਾਈਂ ਕੱਢ ਜਾਂ ਤੂੰ ਦੁਨੀਆ ਖਾਤਰ ਕੱਢੀਆਂ ਗੱਲਾਂ ਐ ਕਹਾਂ ਆਵੇਗਾਤਰ ਕੀ ਕਰੇਗਾ ਹੁਕਮ ਲੋਕਾਂ ਦੇ ਜਲਾ ਪਰਮੇਸ਼ਰ ਦਾ ਹੁਕਮ ਹੈ ਲੱਖ ਬਾਹੀ ਕੋਟ ਲੱਖ ਬਾਹੀ ਕਰੋੜਾਂ ਲੱਖ ਬਾਹੀ ਕੱਢੀਆਂ ਨਹੀਂ ਹੁਣ ਬਹੁਤ ਜੀਵਾਂ ਸੰਗਣਾ ਜੇ ਨੋਮ ਮੈਂ ਚੱਕਰ ਜੋ ਫਫਾਰ ਹੋ ਜਾਂਦਾ ਚੱਕਰ ਘੂੜੇ ਵਿਚੇ ਵਿਚਾ ਕਿੰਨਾ ਘੁੰਦਿਆਂ ਤੇ ਲੋਕ ਵਿਚੇ ਵਿਚਨੇ ਜਿਹੜੇ ਕਿਨ ਬਾਹਰ ਗਲੇ ਵੀ ਇਹ ਕੋਈ ਬੀਜਾਂ ਨੂੰ ਆਪਣੀ ਬਾਤ ਨਹੀਂ ਹੈ ਬਾਹਰ ਕੇ ਬਾਹਰ ਨਿਕਲ ਜੂਏ ਇਹ ਚੋਂ ਮੇਰਾ ਬਾਹਰ ਰਹਿਣਾ ਹੋਊਗਾ ਤਾਂ ਅੰਗਲਵੰਦੀ ਹੈ ساری ਮਾਲ ਨਹੀਂ ਨਿਕਲਦੀ ਜੇ ਕੋਈ ਵੀ ساری ਮਾਲ ਬਾਹਰ ਕੱਢੂ ਜਾ ਫਿਰ ਨਿਕਲ ਜਾਂਦੇ ਉਹ ਕਹਿਣ ਲਿਏ ਹੈ ਮਾਲ ਉਹ ਤਾਂ ਆਇਆ ਹਾਂ ਜੇ ਇਹਨੂੰ ਕਹੇ ਕਿ ਜੇ ਆਏ ਸੁਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਬੇਦਰ ਜਿਹੜਾ ਮਦਰ ਹੋ ਗਿਰੂ ਬੱਚਾ ਜਦੋਂ ਨਾਮ ਪੈਦਾ ਹੁੰਦਾ ਅੰਦਰ ਆਉਂਦਾ ਸਾਇਆ ਨਜ਼ੂਲ ਰੋੜੇ ਅੜਕੇ ਹੁੰਦੇ ਨੇ ਨਾ ਉਹਦੇ ਹੀ ਬੁੱਧਾ ਇਹਨਾਂ ਦੇ ਕਾਰਨ ਦੁਨੀਆ ਚੀਜ਼ਾਂ ਮਗਰ ਪੌੜੀਆਂ ਦੇ ਬੋਲਦਾ ਬੰਨੜ ਚ ਉਹ ਸਾਰੀਆਂ ਗਾਵਨ ਤੋਂ ਚੱਲ ਜਾਂ ਉਹ ਤਾਂ ਜਦੋਂ ਆਪਣਾ ਪੜਾਣਾ ਕੋ ਬਣਾਉਂਦਾ ਹਰ ਕਾ ਨਾਮ ਤਤਕਾਲ ਉਦਾਰੇ ਨਾਮ ਤਤਕਾਲ ਤੋਂ ਉਹ ਹਲਕਾ ਜਿਗਰਾ ਤੋਂ ਪਛਾਲਣ ਤੱਕ ਹਰ ਨਾਮ ਤਤਕਾਲ ਜੋਨ ਜਨਮੇ ਮਰ ਜਾਮ ਨਾਮ ਜਪਤ ਹੋਵੇ ਪਾਵੇ ਵਿਸ਼ਰਾਮ ਜੋ ਵੇਕਾਂ ਨੂੰ ਉਹਨਾਂ ਦੇ ਵੀ ਜਲੂਦਾ ਅਰਜਾ ਤਾਂ ਪਰ ਜੇ ਨੋਬ ਜਪ ਬਲਵੇ ਫਿਰ ਜਪ ਬਲਵੰਨ ਤੇਰੇ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜਿਸ ਤੇ ਬਾਦੋ ਉਹਨੂੰ ਫਿਰ ਬਾਦ ਕਰ ਦੋ ਜਿਦ ਲੋ ਜੀ ਚੰਚ ਉਹ ਕਰ ਲੈ ਇਹ ਕੋੜੀ ਬਾਾਰ ਕਰਤੀ ਹਾਂ ਮੇਲਾ ਵੱਲ ਕਹੂ ਨਾ ਹਰ ਕਾ ਨਾਮ ਕੋਟ ਪਾਪ ਹੋਵੇ ਹੋ ਮੇਲਾ ਜਿਹੜਾ ਸਾਨੂੰ ਚਿੱਤਾਂ ਦਾ ਹੋਰ ਕੋਈ ਮਾਰ ਨਹੀਂ ਤਾਂ ਬਾਤ ਆਇਆ ਲੋ ਹਾਂ ਜਿਹੜਾ ਅਸੀਂ ਜੂਰੋਂ ਚੱਲ ਕੇ ਚਿੱਤਾਂ ਹੌਲ ਗਈਆਂ ਮਨ ਤੇ ਨਾਲ ਬੈ ਲੱਗੀ ਹੋਈ ਹੈ ਸੋਏਗਾ ਨਾ ਮਾੜਾ ਲਗਦਾ ਹੁਣ ਛੋਟਾ ਹੁਦਾਇ ਨਾ ਵੜਾ ਜੇ ਹਮ ਮਨਵੈਲਾ ਜੀ ਤਾਂ ਆਪੀ ਮੈਲਾ ਹੀ ਹੈ ਸੋ ਬਚਾਏ ਸੋ ਵੇੜਾ ਆਮਰ ਕਹੂਲ ਸੋਕਾਰ ਦਾ ਫੁੱਟ ਮਰਣਾ ਹੈ ਉਸਕਾਰ ਨਾਲ ਜੂ ਟੋਰੀ ਜਿਹੜੇ ਬੁੜਾ ਨਾਲ ਅਹੰਕਾਰ ਪੈਦਾ ਹੁੰਦਾ ਉਹ ਮਨੂਰੀ ਤੋਂ ਨਹੀਂ ਹੁੰਦਾ ਜਿਹੜੇ ਬੁੜਾ ਨਾਲ ਅਹੰਕਾਰ ਪੈਦਾ ਪੈਦਾ ਹੁੰਦਾ ਮਨੂਰੀ ਹੁੰਦਾ ਉਹ ਤੋਂ ਮੈਂ ਤਾਂ ਉਹ ਤਾਂ ਹੋਰ ਖੜਾ ਕਰ ਰਿਹਾ ਹੈ ਸਰਕਾਰ ਹੋ ਪੈਦਾ ਕਰ ਰਹੀ ਹੈ ਅੱਜ ਤਾਂ ਅਸੀਂ ਕੁਝ ਗੱਲਾਂ ਦੇ ਅੱਜ ਤਾਂ ਅਸੀਂ ਕੁਝ ਗੱਲਾਂ ਜਿਹੜੇ ਤਾਂ ਗੁਣੇ ਗਿਣੇ ਨੇ ਜਿਹੜੇ ਵਿਲੇ ਉੱਤੇ ਉਹਨਾਂ ਤੋਂ ਗੁਣੇ ਜੋ ਕਰਮ ਧਰਮ ਤੋਂ ਜੋ ਧਰਮ ਦੇ ਕਰਮੂ ਜਿਹੜੇ ਧਰਮ ਦੇ ਕਰਮਾਂ ਨਾਲ ਅਸਾਰ ਪੈਦਾ ਹੋ ਜਾਂਦਾ ਹੈ ਉਹ ਜਾਂਦਾ ਮਨ ਨੂੰ ਦੋਰੀ ਸਵੇ ਸਾਫ ਨਹੀਂ ਕਰ ਸਕਦੇ ਮਨ ਨੂੰ ਮੈਲਾ ਕਰਦੇ ਰੱਬ ਨੇ ਮਾਰਨ ਹਾਂ ਉਹ ਉਹ ਦੱਸਦਾ ਉਹ ਸਵਾਇਆ ਉਹਦੇ ਨਾਲ ਹਾਰ ਕਰਦਾ ਹਾਰ ਹਾਰ ਜਾਂਦਾ ਫਿਰ ਜਲਾਈ ਜਾਂਦਾ ਫਿਰ ਰੇਟੀ ਜਾਂਦਾ ਹਰ ਜੀ ਹਾਂ ਮੇਲਾ ਮੈਲਾ ਮਨ ਕਹੂ ਨਾ ਤੋਗਾ ਹਰ ਕਾ ਨਾਮ ਕੋਟ ਪਾਸ ਕਰਵਾਉਂਦਾ ਆਪੇ ਮੇਲੇ ਦਾ ਮਤਲਬ ਕੀ ਹੈ ਜਿਹੜੀਆਂ ਮਨਵਸਤਾਂ ਦੇ ਕੋਦਾ ਹਮਸਰ ਉਹਨਾਂ ਵਿੱਚ ਪਹਿਲੇ ਜੋ ਪੜੀ ਹੋਈ ਹੈ ਉਹਦੇ ਥੋੜਾ ਮਨ ਮਤਲਬ ਜਿਉਂ ਨੇ ਆਪਣਾ ਜੋ ਜਿਹੜਾ ਕਰਦਿਆਂ ਨੇ ਹਾਂ ਹੋ ਹੋ ਕਰਦਿਆਂ ਜਦ ਵੀ ਜੇ ਮੈਂ ਨਾ ਕਰਦਾ ਉਹ ਮੈਂ ਕਰਦਿਆਂ ਜੀ ਸਾਥ ਜੀ ਨਾ ਬਸ ਤੂੰ ਤੂੰ ਕਰ ਨਾਲ ਦੀ ਮਸਲ ਇਸ ਤੋਂ ਉਤੋਂ ਘਰ ਦੀ ਗੱਲ ਕਰਨ ਤੋਂ ਉਤੋਂ ਪਸਾ ਤੋਂ ਪਿਆ ਉਹ ਜਿਹੜੇ ਰਹਾ ਰਹੂ ਉਹ ਜਿਹੜੇ ਮਾਇਆ ਨਾਲ ਕਰਨ ਵਾਲੇ ਮੱਤਾਂ ਦੇ ਉਹਨਾਂ ਦਾ ਮੱਤਾਂ ਦੇ ਨਾਲ ਨੋ ਜੁੜਿਆ ਹੋਇਆ ਜਿਵੇਂ ਬੁੱਧ ਮੱਤਸ ਬੁੱਧਾਂ ਨਾਲ ਜੁੜਿਆ ਹੋਇਆ ਮੱਤ ਤੇ ਉਹ ਉਹਦੀ ਮੱਤ ਹੈ ਨਹੀਂ ਉਹਦੀ ਮੱਤ ਹੈ ਉਹਦੀ ਮੱਤ ਜੈਨ ਮੱਤ ਜੈਨ ਮੱਤ ਵੈਸ਼ੇਨ ਮੱਤ ਵੈਸ਼ੇਨ ਜਿਹਨੀਆਂ ਵੀ ਬਤਨ ਜਿਨ੍ਹਾਂ ਨਾਲ ਨੋ ਆਗਿਆ ਜੁੜਿਆ ਹੋਇਆ ਕੈ ਇਸਲਾਮ ਵਾਲਿਆਂ ਦੀ ਕੈ ਉਦਿਆਂ ਦੀ ਐ ਸ਼ੈ ਕਿਸੇ ਨਹੀਂ ਹੈ ਉਹ ਹਾਲੀਆਂ ਮਸਲ ਇਹ ਮਸਲਾ ਕਿਸੇ ਗਾਂਵ ਦੀ ਹੋ ਰਿਆ ਹੈ ਇਹ ਗੁਰਮਤ ਹੈ ਜਦੋਂ ਇਸ ਕਰਕੇ ਬਹੁਤੇ ਬੰਦੇ ਦੀ ਬਾੜੀ ਕੱਢੀ ਹੋ ਉਹ ਗਾਂਵ ਤੇ ਕੁਆਡਮੀ ਵਾਲੇ ਫਿਰ ਦੇਖੋ ਆਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੈਤੀਆ ਛੱਤੀਆ ਜੁਨੀਆਂ ਦੀ ਬਾਣੀ ਆਪਾਂ ਬੋਲਦੇ ਹਾਂ ਪਰ ਦਾਸੂ ਨੇ ਵੀ ਇੱਕੋ ਜਿਹੀ ਬਾਣੀ ਦੀ ਜਿੱਦੇ ਦੂਜੇ ਜਿਆ ਆਬੀ ਸ਼ਬਦ ਜਿਹੜੇ ਇਹ ਰਸ ਨੇ ਕੋਨਾ ਜੀ ਕੋਮਤ ਦੀ ਬਾਣੀ ਜੀ ਇਹ ਕੋਪੀ ਦੀ ਜਿਹੜੀ ਬਹੁਤ ਬਾਰੇ ਉਹਨੂੰ ਦੀ ਜਿਹੜੀ ਮਾਰ ਕੱਲੇ ਬਰਾਚੋਂ ਕਰੇ ਫਰਦਰ ਇਹ ਕਹਿੰਦੇ ਕਿ ਸਭੀ ਕਾਪੀ ਕੀ ਤੇ ਆਉਂਦੇ ਉਹ ਸਭ ਵੋਟ ਬਰਾਮਦ ਜਿਹੜਾ ਪੂਰਾ ਥੱਲਾ ਨਾਮ ਦੇ ਉੱਤੇ ਨਹੀਂ ਹੈ ਉਹ ਜਿਹੜਾ ਤਰਕ ਵਿੱਚ ਲਾਉਂਦੇ ਤੇ ਦੋ ਦੋ ਕਿੰਨਾ ਗਿਆ ਕਿ ਕਹੇਗਾ ਕਿ ਧਰਮ ਝਾਲੜਾ ਕਰੂਗਾ ਕਿ ਕਹਾਂ ਮੈਂ ਧਰਮ ਚਰਾਂਗੇ ਉਹ ਅੜੜ ਗਿਆ ਨਾ ਅੜੜ ਗਿਆ ਧਰਮ ਝਾਲੜਾ ਕਰਨਾ ਉਗਲ ਹੋ ਗਿਆ ਮੈਂ ਧਰਮ ਦੇ ਕੋਲੂ ਦੇ ਬੋਲ ਬਕਦੇ ਨਾ ਸਿੱਖਦੇ ਧਰਮ ਦੇ ਵਿੱਚ ਝਾਲੜਾ ਹੈ ਕੋ ਤਾਂ ਮੈਂ ਆਪ ਸਿੱਖੜੀ ਇਸ ਕੋ ਮੈਂ ਦੂਜੇ ਰੂਜ਼ ਹੈ ਦੇ ਲਈ ਆਖੇ ਤੋ ਦੁਹਾਂ ਵਰਗਾ ਉਹਦੇ ਵਿੱਚ ਜਿਹੜੀ ਹੈ ਸ਼ਾਸਤਰ ਕਾਇਮ ਕਰਦਾ ਫਾਸ਼ਿਸ਼ ਕਰਦਾ ਉਹ ਸਭ ਐਸਾ ਗਿਆਨ ਜੇ ਕੋ ਮੰਦ ਬਿਹਰੇ ਲੋਕ ਜੇ ਕੋ ਜੋ ਸਭ ਲੋਕਰ ਹੁਕਮ ਚਲਾਵੇ ਤੇ ਤੇ ਨਹੀਂ ਉਹ ਜੇ ਉਸ ਸਮੇਂ ਉਹ ਲੋਹਾਂ ਉਹ ਆਪ ਬੋਲਦੇ ਅੱਲਾ ਯੇ ਰਾਮਦਾਨੀ ਕਹਿ ਸਮਝਾ ਗਿਆ ਕਹਿ ਸਮਝੇ ਨਾ ਉਹ ਕੋਈ ਕਰੀ ਵਰ ਇਹੋ ਹੀ ਗੱਲ ਹੁੰਦੀ ਏ ਦੂਰੇ ਪੁੰਨਾ ਚ ਆਉਂਦੇ ਸਨ ਵੀ ਹੂੰ ਉਹ ਬੋਲਦੇ ਬਿਠੇ ਨੇ ਕਹਿੰਦਾ ਨਹੀਂ ਉਹਨਾਂ ਦਾ ਬਿਠਾ ਜਾਏਗਾ ਚਾਹੇ ਜਨਾ ਦਾ ਪ੍ਰਚਾਰ ਕੀਤਾ ਹੋਵੇ ਉਹਦੇ ਸੱਜ ਕੋੜਾ ਹੁੰਦਾ ਫਾਦੀ ਬੋਲਿਓ ਹੈ ਸਰਦਾਰ ਨੇ ਕਹੋਈ ਇਹ ਜੇ ਇਹ ਪੁਰਸਾਰਨ ਮੇਖੇਨ ਤਾਂ ਕੋਈ ਲਾਗੂ ਪੈਦਾ ਹੋ ਜਾਣਾ। ਉਹਨਾਂ ਨੇ ਕਿਹਾ ਵੀ ਬਿਠਾ ਜੀ ਬੋਲਾਂ ਤੇ ਇਹ ਲੋਕਾਂ ਨਾਲ ਖੜੇ ਹੋਏ ਨੇ। ਚਾਹੇ ਅੰਦਰੋਂ ਨਾਲ ਬੜੀਆ ਪਿਆਰ ਕਰੋ ਪਰ ਬੋਲੋ ਕੌੜੀ ਧੋਲ ਜਨਨ। ਸਾਗੇ ਡਰਦੇ ਤਾਂ ਇਹ ਕੋਈ ਸੰਤ ਦਾ ਸਾਦਾ ਸੱਚਾਈ ਹੈ ਸਾਹ ਦੇਖੋ ਮੈਂ ਹੀ ਰੋਣਾ। ਹੂੰ। ਧਰਤ ਨੂੰ ਇਹ ਤਾਂ ਸੰਤ ਜਿਹੜੇ ਉਸੇ ਰੋ ਸਾਰੇ। ਨਹੀਂ ਦੱਸਣਾ ਪਰ ਇਹ ਹੀ ਭਗਵਾਨ ਐਸਾ ਨਾਮ ਜਪੋ ਮਾਨ ਰੰਗ ਨਾਨਕ ਪਾਈਏ ਸਾਧ ਕੇ ਸਾਥ ਐਸਾ ਨਾਮ ਜਪੋ ਮਾਨ ਰੰਗ ਐਸਾ ਨਾਮ ਜਪੋ ਜੀਦਾ ਲੰਬੀ ਘੜਜਾ ਬੁੱਝੂ ਬਨੋ ਰਾਮੇ ਜਜੇ ਪਤਾ ਲੱਗੇ ਜੇ ਬਿਦਾਂ ਹੁ ਜਪਿਆ ਹੋਇਆ ਅਸਰ ਹੋ ਜੇ ਬੁੱਝੇ ਤੇ ਪਤਾ ਲੱਗੇ ਵੀ ਹਾਂ ਜੇਕਰ ਹੁਟਾ ਹੰਡ ਕੀਤਾ ਹੋਇਆ ਤਾਂ ਉਹਦਾ ਸਬੂਤ ਹੋਵੇਗਾ ਕਿ ਤਾਰੂਤ ਵੱਡਾ ਹੋ। ਉਹਦਾ ਮਾਰੋ ਦੇ ਰੰਗ ਦੇ ਰੱਭਿਆ ਉਹਦੇ ਰੰਗ ਚੜਿਆ ਆ ਹੋਵੇ। ਇਹਨਾਂ ਨੂੰ ਜਪਿਆ ਤਾਂ ਉਹਦਾ ਰੰਗ ਵੀ ਚੜਿਆ ਹੋਵੇ। ਐਸਾ ਲੋਕ ਜਪੋ। ਮੰਨ ਮੰਨ। ਮੰਨਾ ਨਹੀਂ ਜੇ ਨੂੰ ਮੰਨ ਗਿਆ ਤਾਂ ਪਤਾ ਲੱਗੇ ਉਹਦਾ ਵਿਚਾਰ ਅੰਦਰ ਹੈ। ਉਹ ਜਾਨ ਦਾ ਸੁਭਾਅ ਬਦਲੇ ਮਨ ਦਾ ਬੁੱਢਾ ਬੁੱਢਾ ਸੁਭਾਅ ਵੀ ਉਹ ਜਿਹੜਾ ਬਦਲੇ ਮਨ ਤੇ ਸੁਭਾਅ ਤੇ ਵਿੱਚ ਦਾ ਬੰਦਾ ਰੰਗ ਕਪਾਈਏ ਸਾਧਕੇ ਸੰਗ ਰੰਗ ਕਪਾਈਏ ਸਾਧਕੇ ਸੰਗ ਰੰਗ ਦੇ ਗੱਗੇ ਨੂੰ ਸਿਹਾਰੀ ਹੈ ਸੰਗ ਨੂੰ ਵੀ ਸਿਹਾਰੀ फेर ਬਰੁਸ ਨੇ ਐਸਾ ਨਾਮ ਜਪੋ ਮਨ ਰੱਖੋ ਮਨ ਰੱਖੋ ਰੰਤਨ ਰੰਤਨ ਵਾਸਤੇ ਕਿਹਨ ਹੱਦੀ ਵਾਸਤੇ ਜਪਣਾ ਨਾ ਕੇ ਜਪਣ ਵਾਸਤੇ ਜਪਣ ਜੇ ਰੱਬ ਨੂੰ ਚੜਾ ਤੇ ਜਪਿਆ ਦੀਗੇ ਮਨੁੱਖੀ ਹੀ ਲਭਾਇਆ ਹਾਂ ਹਾਂਜੀ ਹਾਂਜੀ ਇਹ ਹੋਰੇ ਵੀ ਬੰਦੂ ਜੇ ਰੰਗ ਨਹੀਂ ਘੜਿਆ ਜਫਿਆ ਨਹੀਂ ਗਿਆ ਨਾਨਕ ਪਾਈਏ ਸਾਧ ਕੇ ਸੰਗ ਨਾਨਕ ਪਾਈਏ ਸਾਧ ਕੇ ਸੰਗੀ ਸਾਧ ਕੇ ਸੰਗ ਕੇ ਕਾਇਆ ਸੰਗੀ ਹਾਂ ਸੰਗੀ ਕਾਇਆ ਇਹ ਅਬ ਇਹ ਇਹ ਪੋਸੀਬਲ ਕਿੰਨੇ ਹੋਗਾ ਕਿ ਇਹ ਅਨੁਗਜਿਆ ਜਾਵੇ ਜੀਵਨਾਂ ਬਿਤੇ ਲਈ ਜਿੰਨਾ ਚਿਰ ਮਹੰਤੀ ਸਰਦਾ ਉਹਨਾਂ ਚੰਦੀ ਮਨ ਸਰਦਣਾ ਪ੍ਰਾਪਤੀ ਕਿ ਆਪਣਾ ਜਿਹੜਾ ਸੰਗੀਤ ਹੈ ਗੁਰੂ ਗੋਬਿੰਦ ਸਿੰਘ ਜੀ ਕਹੇ ਤੇਰਾ ਸੰਗੀਤ ਮਾਣੇ ਉਹਨਾਂ ਡੁੱਬਣਾ ਗੱਦਾ ਵੀ ਹੈ ਰੰਦੇ ਦੇ ਵਿੱਚ ਜੇ ਡੁੱਬਣਾ ਨਹੀਂ ਬੋਲਦਾ ਕੋਣਾ ਵਿਛੜੂਗਾ ਵੇ ਹੂੰ ਜੇ ਜੋ ਸੁਣਿਆ ਮੁੱਲਣਾ ਹੀ ਨਹੀਂ ਚਾਹਦਾ ਹੈ ਕੋਈ ਜਿਦਾਈ ਦੀ ਹੈ ਉਹ ਤਾਂ ਭੇਜਣਾ ਚਾਹੁੰਦਾ ਨਹੀਂ ਉਹਨਾਂ ਕਿਹੜੂ ਗੋੜੇ ਦੂਰੋਂ ਦੇਖ ਕੇ ਰੱਖ ਗਰੂ ਕਪੜਾ ਘਾ ਲਿਆ ਕਿ ਡੁੱਬਣਾ ਡਾ ਗਾਜੀ ਬੀ ਵਿਚ ਆਉਂਦੇ ਬਾਹਰ ਜਦੋਂ ਉਹਨੂੰ ਕਿ ਬਾਹਰ ਦੇ ਕੋਲੇ ਹੋਇਆ ਸਾਡਾ ਬਾਗੂ ਵਿੱਚ ਕੋਲੇ ਹੋਇਆ ਕਪੜਾ ਘਾ ਲਿਆ ਤੇ ਮਾ ਡੁੱਬਣਾ ਜਾਇਆ ਬਾਹਰ ਬਾਹਰ ਗਲੇ ਜੰਦੂ ਜੇ ਉਹ ਮਾ ਨਹੀਂ ਗਾਇਆ ਜੇ ਚੱਲ ਜੇ ਸਮੇਂ ਨਾ ਹੋ ਗਏ ਦੁੱਖ ਪਾਰ ਸਾਧ ਹੋਰੂੰ ਸਾਡ ਕਰ ਫਰਵੀ ਸਾਹ ਢੂੰਗਾ ਜੇ ਉਹ ਮਿਲੂਗਾ ਬੰਦ ਜਦ ਮੈਂ ਗੁੱਟਾਂ ਆ ਗਿਆ ਰਿਮਿਚ ਸਾਡੀ ਸਕੀ ਦੀ ਕਿਦੋਂ ਸਾਡ ਕਾਇ ਸੱਗੀ ਪਹਿਲੇ ਸਾਧ ਰਹੇ ਹੋ ਹੋਊਗਾ ਸੇਵਦਾ ਇਸ ਜੀ ਨੂੰ ਤਾਂ ਤੇਰੇ ਬਣੀ ਬਣਦੀ ਹੈ। ਅਸਾ ਨਾਮ ਜੱਗੋ ਮਨ ਰੰਗੀ ਨਾਨਕ ਪਾਈਏ ਸਾਧਕੇ ਸੰਗੀ। ਵੀਰਾਂ। ਮੈਂ ਰਹਿਣਾ। ਜਿਹੜਾ ਬੜਾ ਜਿਹੜਾ ਬੜਾ। ਜਿਹੜੀ ਨਾਮ ਜੱਗੋ ਮਨ ਰੰਗੀ। ਆਹ ਠੀਕਾ ਨਾਲੇ ਪਾਏ ਸਾਧਕੇ ਸੰਗ